ਜੋ ਭਈ ਰਾਣੀ ਏਕ ਨਗੌਰੇ ਰਹੈ ਗਰਭਵਤੀ ਤਾ ਕੋ ਜਗ ਕਹ ਪੂਤਰਾਵ ਕੇ ਗ੍ਰਹਿ ਕੋ ਨਾਹੀ ਚਿੰਤਾ ਇਹ ਤਾਏ ਮਨਵਾਹੀ ਗਰਭਵਤੀ ਆਪੈ ਠਹਿਰਾਇਓ ਪੂਤਾਨ ਕੋ ਆਣ ਜਿਵਾਇਓ ਸਭ ਕੋ ਪੂਤਰਾਵ ਕੋ ਮਾਨੈ ਤਾ ਕੋ ਭੇਦ ਨ ਕੋ ਜਾਣੈ ਅੜਿਲ ਦੋਏ ਪੁੱਤਰ ਜਬ ਤਾਹ ਮਿਦਾਤਾ ਭੁੰਦੈ ਰੂਪਵੰਦ ਸੁਭ ਸੀਲ ਜਤਪਰਤ ਹੋਤ ਭੇ ਤਬ ਓਨ ਦੂਹੂ ਪਾਲ ਕਨ ਲੈ ਕੈ ਵਿਖ ਦਈ ਉਹ ਨਿਜ ਪੂਤਨ ਕਾ ਰਾਜ ਪਕਾਵਤ ਤਹ ਭਈ ਪਾਂਥ ਪਾਸੋ ਰੋਦਨ ਕੀਓ ਪੁਕਾਰ ਕੈ ਨਿਰਖਾ ਤਿਨ ਕੀ ਓਰ ਸਿਰੋ ਕੈ ਪ੍ਰਾਨ ਦਾਤ ਹੂੰ ਆਏ ਕਹਿਓ ਨਾ ਸੋਕ ਕਰ ਹੋ ਅਕਥ ਕਥਾ ਕੀ ਕਥਾ ਜਾਨ ਜੀ ਤੀਰ ਤਾਰੇ ਦੋਹਰਾ ਜੀਤ ਤਿਹਾਰੇ ਪੂਤ ਦੋ ਸਦਾ ਰਹੈ ਜਗ ਮਾਹੇ ਉਨਕੋ ਸੋਕ ਨਾ ਕੀਵਿਆ ਜੀਤ ਅਜੋ ਤਵ ਨਾ ਹ ਪਈ ਜੋ ਕੋ ਤ੍ਰਿਆ ਤਹਾ ਚਲ ਆਵੈ ਜਹ ਆਏ ਪ੍ਰਭੂ ਜਿਤਾਵੈ ਚਾਰ ਜਗ ਕੂਤ ਤਿਹਾਰੇ ਦੋਹਨ ਕੋ ਸੋਕ ਵਿਚਾਰੇ ਤ੍ਰਿਆ ਚਿਤਰੇ ਪੂਪ ਮੰਤਰੀ ਸੰਬਾਦੇ 150 ਚਰਿਤ੍ਰ ਸਮਾਪਤ ਮਸਤ ਸੋਮਸਤ ਅਪਜੂ ਚਉਪਈ ਕੂਪਤ ਸਿੰਘ ਰਾਜ ਆਰਹਿ ਰਾਜੌਰੀ ਕੇ ਮਾਹੇ ਸਦਾ ਸੀਲ ਆਤੇ ਰਹੋ ਤਮਨ ਮੈਂ ਨਾਹੀ ਚੌਪਈ ਤ੍ਰਿਆਗੁਮਾਨ ਮਤੀ ਤੇ ਜਨਿਅਤ ਅਤ ਸੁੰਦਰ ਤੋਹ ਲੋਕ ਬਖਾਨੀਅਤ ਪੱਜ ਕੇ ਸੰਗ ਨੇਹ ਤੇ ਭਾਰੋਂ ਵਾਕੋ ਰਤ ਪ੍ਰਾਨ ਤੇ ਪਿਆਰੋਂ ਜਬ ਰਾਜਾ ਰਾਣ ਕਾਜ ਸਿਦਾਰੈ ਤਬ ਰਾਣੀ ਇਹ ਭਾਂਤ ਉਚਾਰੈ ਹਉ ਨਹਿ ਤਮੈ ਛੋਰ ਗਰਹਿ ਰਹਿ ਹੂੰ ਪ੍ਰਾਨਨਾਥ ਕੇ ਚਰਨਨ ਗਏ ਹੂੰ ਜਾਵਨ ਰਿਪਕੋ ਰਾਨ ਬਾਨ ਕਹੂ ਆਵੈ ਤਰੀ ਆਗੇ ਵੈ ਖੜਕ ਬਜਾਵੈ ਬੈਰਨ ਜੀਤ ਬੌਰ ਆਵੈ ਪਾਂਦ ਕੇ ਭੂਖ ਮਾਵੇ ਇਕ ਦਿਨ ਯੁੱਧ ਨਿਰਵਤ ਬਨ ਆਇਓ ਚੜ ਗਏ ਪੈ ਤਰੀ ਸਹਿਤ ਸਿਧਾਇਓ ਜਾ ਤਹ ਭੇਰ ਰਣ ਪਾਰੀ ਨਾਚੇ ਸੂਰ ਹੰਕਾਰੀ ਅੜਿਲ ਪਾਂਦ ਪਾਂਦ ਰਣ ਸੋਡ ਸੰਗਾਰੇ ਪਾਤ ਪਾਤ ਰੱਥ ਬਾਜ ਵਿਦਾਰੇ ਸਰ ਪ੍ਰਹਾਰੇ ਨਿਰਖ ਜੁਦ ਕੋ ਸੂਰ ਪਰੇ ਅਰ ਰਾਏ ਕਹਿ ਹੋ ਮੰਡਲ ਤੂਰ ਮਿਰਦਾਂਗੇ ਮੁਚੰਗ ਬਜਾਏ ਕੈ ਪਠੈ ਪਖਰੀਆਂ ਕੋ ਪਦਕ ਜੀ ਮੈਂ ਜਗਿਓ ਸਜੇ ਸੰਜੋਨ ਸੈਨ ਦੂਹੂ ਦਿਸ ਉਮਗਿਓ ਬਜੇ ਜਝੂਆ ਨਾਦ ਪਰੇ ਅਰ ਰਾਏ ਹੋ ਟੂਕ ਟੂਕ ਵੈ ਜੂਝੇ ਸੁਭ ਸੁਮਹਾਏ ਕੈ ਚਟਪਟ ਸੁਬਟ ਬਿਗਟ ਕਟ ਕਟ ਕੈ ਭੂ ਪਰੈ ਖੰਡ ਖੰਡ ਕਿਤੇ ਅਖੰਡਿਆਂ ਖੈ ਖੱਗਣ ਮਰੈ ਟੂਕ ਟੂਕ ਵੈ ਗਰੈ ਨਮੋਰੈ ਨੈਕ ਕਮਾਨ ਹੋ ਪ੍ਰਲੈ ਕਾਲ ਸੋਕਿਓ ਵਿਧਾਤਾ ਬਹਰ ਜਨ ਜਬ ਰਾਣੀ ਕੇ ਸੈਤਰਾਬ ਭਰੈ ਦੂ ਕੈਬਰ ਕਠਨ ਕਮਾਨਣ ਕਰ ਤਰੈ ਦੱਖਣ ਵਿਸਖ ਦਿਖਾਏ ਬਾਹ ਮਾਰਿ ਮਾਰ ਹੀ ਹੋ ਏਕ ਕਾਇਕੈ ਸੰਗ ਚੂਰ ਕਰ ਡਾਰਿ ਹੀ ਜੇਠ ਕੇ ਮਾਸ ਅਦਿੱਤ ਅਧ ਦਿਨ ਚੜਿਓ जनक करारण ਛੋਰ ਨੀਰ नायक हडयो बज्जर बिसके आस हनयो सो सैन उचायो हो जबे बिसन लक्ष्मी के साथ रसायो रानी जातन बिस्क प्रहार है कोप कर तत शिन मृद गुए परी सूर सो भूमि पर फूल दए बरखाए गगन ते देवतान हो रानी को रण हेर उचारै धन्य तन त्रिया शायद निर लर्यो अधिकरिष खाए गिरयो अंबारी मदमूर्छ ना होए कर ਹੋ ताव त्रिए लियो उचाए नाथ दूहु भजन पर तमन अंबारी संग निरपय बांधत पई निज कर करह उचाए सारत दल दई जीवत निरबत लग सुवट सवै धावत पए ओ चित्र विचित्र अयोध्यां ते ठां करत पए पीस पीस कर दां सूर मारिस परे टूक टूक वै परे तौ ਉਹ ਜੀਤ ਨਗਾਰੇ ਬਜੇ ਅਧਿਕਾਰ ਖਾਏ ਕੈ ਤਬ ਰਾਣੀ ਨਿਜ ਕਰਨ ਬੈਰੀਐ ਮਾਰ ਕੈ ਨਿਜ ਸੁਤ ਦੀਨੋ ਰਾਜ ਸੋ ਘਰੀ ਵਿਚਾਰ ਕੈ ਕਰ ਕੈ ਬਡੋ ਅਡੰਬਰ ਆਵ ਜਰਨ ਚਲੀ ਉਹ ਤਬੈ ਗगन ਤੇ ਬਾਣੀ ਤਾਹੇ ਭਈ ਪਲੀ ਕਿਰਪਾ ਸਿੰਧ ਜੂ ਕਿਰਪਾ ਅਦਿਕ ਤੁਮ ਪਰ ਕਰੀ ਨਿਜ ਨਾਇਕ ਕੇ ਹੇਤ ਬਹੁਤ ਬਿਦ ਤੈ ਲਰੀ ਤਾਤੇ ਆਪਣੋ ਭਰਤਾ ਲਿਓ ਜਿ ਆਇ ਕੈ ਹੋ ਬਹੁ ਰਾਜ ਕੋ ਕਰੋ ਹਰ ਖੁਬ ਕੈ ਦੋ ਰਮ ਸਤਰਨਾਥ ਹਨ ਜੁਦ ਕਰ ਪਧੈ ਜਿ ਆਏ ਬਹੁ ਰਾਜ ਆਪਣੂ ਕਰਿਓ 나ਥ ਸਹਿਤ ਸੁਖ ਪਾਇ ਇਤ ਸ੍ਰੀ ਚరిత్ర ਤਰਪਖਿਆਨੇ ਤ੍ਰਿਆ ਚਿਤਰੇ ਭੂ ਮੰਤਰੀ ਸੰਬਾਦੇ 151 ਨੋ ਚరిత్ర ਸਮਾਪਤ ਮਸਤ ਸੁਖ ਮਸਤੇ ਚਿੱਤਰ ਸਿੰਘ ਬਾਜ ਦੋਹਰਾ जय त्री इन रण कियो तै सो करै न कोए पाछे पयो न अब सुनयो आगे कबहु न होए चौपी तम मंत्रीए सुनो राज बात हमारी बिसम साथ जंभसर लर्यो ताको प्राण लक्ष्मी हरयो ताते हो इंद्र पै पीतयो 14 भोंन रह तन जीतेयो सो अश्वर पर चढ़ आयो तुम बल जुद्ध हरि साथ मचायो अड़ेल पांत पाता सोरण इन्द्रमचायो सूर चंद्र थक रहे ना कछु बसायो देव दयत है मृत्युक बिराजे ताहे रण हो जन अल किसके बाग बिराजे मार जन पुजंग छंद लै वीर तीरे महाकोप ठूखे चहुं गोर गाजे हठी इन्द्र जूके उते दयत बाके तहै देव रूरे हठे ना हठीले ਬਧੇ ਬੀਰ ਬਾਨੇ ਦਹੂ ਔਰ ਗਾਜੇ ਮਚਿਓ ਜੁਦਗਾੜੋ ਪਰੀਮਾਰ ਭਾਰੀ ਬਹੇ ਤਰਵਾਰ ਕਾ ਤੀ ਗਟਾਰੀ ਮਹਾਕੋਪ ਕਹਿ ਕਹਿ ਬਲੀ ਦੈ ਤਾਏ ਹਠਿਨ ਕੋਪ ਕਹਿ ਸ਼ਸਤਰ ਅਸਤਰ ਚਲਾਏ ਬਧੇ ਕੌਜ ਕਾ ਜਵੈ ਜੰਬ ਗਿਜਿਓ ਤਵੈ ਖੇਤ ਦੇ ਵੇਸ ਭਜਿਓ ਚਉਪਈ ਪਾਜ ਤੇਂਦਰ ਜਾਤ ਪੈਉ ਤਹ ਲੈ ਲక్ష్ਮੀ ਹਰ ਥਿਰ ਜਾ पांत पांत ਵੈ ਦੁਖਤ पुकारे तुमरे जीत नाथ हम ਜਗਪਦ जगपत सूल कोप तवे आयो लक्ष्मी क्वार ले संग सिदायो बांद सनद बिराजे तहां गाजद वीर जंभ बो जहां अड़ेल 20 बाण बिसना चलाए कोप कार लगे जंभ के देह गए ओ खान कारे भय सून बिस्खोतम अधिक ਲਖਮਕੌਰ ਐਸੇ ਕਹਿਓ ਸੁਨੋ ਬਿਸਨ ਜੂਬੈਨ ਯਾਕੋ ਹਉ ਹੂੰ ਜੀਤ ਕੈ ਪਠਾਉ ਜਮਕੇ ਐਨ ਅੜਿਲ ਬਿਸਨ ਠਾੜ ਕੈ ਲਖਿਉਕਾਰੇ ਕਰ ਤਨ ਖਲੀਏ ਚਿਤ੍ਰ ਬਚਿਤ੍ਰ ਯੋਧਨਤਾ ਸੋ ਐਸ ਕੀ ਅਮਿਤ ਰੂਪ ਦਿਖਰਾਏ ਮੋਹ ਹਰ ਕੌਲਿਓ ਉਹ ਬਹੁ ਕਾਇਨ ਕੇ ਸੰਗ ਤਾਹੇ ਕਾਇਲ ਕੀਓ ਮੇਸ ਹੀ ਕਹਿਓ ਨਾ ਹਨ ਰੇ ਹਰੇ ਮਾਰ ਹੈ ਬਹੁ ਜੁਦ ਕਰਿਆਸ ਬਹੁਰ ਸੰਗਾਰ ਹੈ ਜਾ ਪਾਛੇ ਕੀ ਹੋਰ ਸਤਿ ਸਤ ਨਿਹਾਰ ਹੋ ਹੋ ਹੋ ਦੋਹਰਾ ਲక్ష్ਮਿਕਵਰ ਜਬ ਜੰਬ ਸੋ ਐਸੋ ਕੀਓ ਚਰਿਤ੍ਰ ਮਾਰ ਸੁਦਰਸ਼ਨ ਸੋ ਲਿਓ ਸੁਖਤ ਕੀਏ ਹਰੀ ਮਿੱਤਰ ਇਹ ਸ੍ਰੀ ਚਰਿਤ੍ਰ ਭਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 152 ਚਰਿਤ੍ਰ ਸਮਾਪਤ ਮਸਤ ਸੋਬ ਜੋ ਭਈ ਨਾਜ ਮਤੀ ਅਬਲਾਜ ਕਹੈ ਅਟਕੀ ਏਕ ਨਿਰਬਤ ਪਰ ਰਹਿ ਬਹੁ ਸਿੰਘ ਜੇ ਜਗਤ ਬਖਾਨਾ 14 ਲੋਕ ਆਨ ਕਉ ਮਾਨੈ ਨਿਰਬ ਕੀ ਪ੍ਰਵਾਹੇ ਕੇਲ ਕਰੈ ਮੋਸੋ ਚਿਤ ਚਹੀ ਪਾਂ ਪਾਂ ਤੋ ਹਾਥ ਨਹ ਆਏ ਜਬ ਤ੍ਰੇ ਸੋਏ ਸਦਨ ਮੈਂ ਜਾਵੈ ਨਿਰਬ ਕੀ ਪ੍ਰਵਾਹ ਚਿਤ ਆਵੈ ਚੱਕ ਚੱਕ ਉਠੈ ਨੀਦ ਨਹ ਪਰੈ ਮੀਤ ਕੀ ਚਿੰਤਾ ਕਰੈ ਦੋਹਰਾ ਵਹਿ ਸਮਰੱਥ ਅਸਮਰੱਥ ਮੈ ਵਹਿ ਸਨਾਥ ਮੈਂ ਅਨਾਥ ਜਤਨ ਕਮਨ ਸੋ ਕੀ ਜਿਐ ਆਵੈ ਜਾਤੇ ਹਾਥ ਚੌਪੀ ਕਾਸੀ ਵਿਹਿਆ ਕਰਵ ਤੈ ਲੈ ਹੂੰ ਪੀ ਕਾਰਨ ਜੀ ਦੈ ਹੋ ਮਨ ਭਾਵਤ ਪ੍ਰੀਤਮ ਜੋ ਪਾਉ ਬਾਰ ਅਨੇਕ ਬਾਜ਼ਾਰ ਬਿਕਾਉ ਦਹਰਾ ਕਹਾ ਕਰਉ ਕੈਸੇ ਬਚਉ ਲਗੀ ਬਿਰਹ ਕੀ ਪਾਹ ਓਨ ਕੀ ਹਮ ਕੋ ਹਮਰੀ ਓਨਾ ਨ ਨਾਜ ਮਤੀ ਤਾ ਵੀ ਆਪਣੀ ਲੀਨੀ ਸਖੀ ਬੁਲਾਏ ਬਹੁ ਸਿੰਘ ਰਾਜਾ ਪਏ ਕਹੋ ਸੰਦੇਸ਼ ਹੋ ਜਾਏ ਬਚਨ ਸੁਣਤਾ ਕੋ ਸਖੀ ਤਾ ਪਹੁੰਚੀ ਆਏ ਨਾਜ ਮਤੀ ਜੈਸੀ ਕਹੋ ਤਿਉ ਤਿਨ ਕਹੋ ਸੁਨਾਏ ਅੜਿਲ ਮੈਂ ਛਬ ਤੂਰੀ ਨਿਰਖਨਾਥ اٹਕਤ ਪਈ ਵਿਰਹਾ ਸਮੁੰਦ ਗੇ ਬੀਜ ਬੂੜ ਸਿਰ ਲਾਉ ਗਈ ਏਕ ਵਾਰ ਕਰ ਕਿਰਪਾ ਹਮਾਰੇ ਆਈਏ ਹੋ ਮਨ ਭਾਵਤ ਕੋ ਹਮ ਸੋ ਭੋਗ ਕਮਾਈਐ ਚਉਪਿੰ ਜਬ ਚੇਰੀ ਅਸ ਜਾਇ ਉਚਾਰੀ ਤਵ ਰਾਜੈ ਯੋਹੀਐ ਵਿਚਾਰੀ ਸ਼ੋ ਬਾਤ ਤੇ ਤ੍ਰਿਆ ਕਹਿਜੈ ਜਾਤ ਆਪ ਧਰਮ ਜੋਤ ਰਹਿਜੈ ਅੜਿਲ ਦੋਏ ਛਤਰ ਹਮਰੇ ਉਤੇ ਏਕ ਸੰਘਾਰੀਐ ਬਿਨਾ ਕਾਹੇ ਕੇ ਕੀਏ ਦੂਸਰੋ ਮਾਰਿਆ ਤਬ ਮੈਂ ਤੁਮ ਆਪਣੇ ਸਦਨ ਬੁલાਏ ਹੋ ਮਨ ਪਾਵਤ ਕੇ ਤੁਮਸੋਂ ਭੋਗ ਕਮਾਏ ਹੂੰ ਜਾਇ ਸਾਧਰੀ ਕਹੋ ਤ੍ਰਿਆ ਸਰੁਪਾਇ ਕੈ ਕੀ ਬੱਧੀ ਉੱਠੀ ਮਰ ਰਾਏ ਕੈ ਹਵਾ ਕਾ ਬਾਜ ਅਰੂੜ ਭੇਖ ਨਰ ਧਾਰਕ ਹੈ ਹੋ ਨਿਰਿਪਕੇ ਅਰ ਪੈ ਗਈ ਚਿਤ੍ਰਿਤ ਵਿਚਾਰ ਕੈ ਸੁਨੋ ਰਾਵ ਜੂ ਮੋਕੋ ਚਾਕਰ ਰਾਖਿਐ ਤਾਹ ਕੋ ਕਰੋ ਮੋਹਿਮ ਜਾਹ ਬਿਨ ਅਰ ਖੇਤ ਨ ਬਾਜੀ ਟਾਰਿਓ ਤਾਹ ਕੋ ਸੂਰ ਨਿਹਾਰ ਨਿਰਭਤ ਜਾਕਰ ਕੀਓ ਗ੍ਰਹਿ ਤੇ ਕਾਰ ਖਜ਼ਾਨੋ ਤਾਹ ਕੋ ਦੂਜੋ ਰਾਵ ਬੁਲਾਏ ਸੋ ਬੀਰ ਬੁਲਾਏ ਕੈ ओ बाहु सिंह पै चढ़यो महारे सिखाय कह चौपई नाजमती मती ए भोंत उचारी सुनो राव तुम बात हमारी सब वीरन को बोल पठैया सबके सर पर नाम डरिजा इंदोरा जब गाड़ो रण परगो बह तीर तलवार बिना नाम सर पै लिखै साखिया कवन विचार चौपाई नाज जब ऐस बखान्यो सत्य सत्ते, सत्ते राजै ਸਕਲ ਸੂਰਮਾ ਬੋਲ ਪਠਾਏ ਸਵਨ ਸਿਰਨ ਪਰ ਨਾਮ ਲਿਖਾਏ ਦੋਹਰਾ ਸਰ ਪਰ ਨਾਮ ਲਿਖਾਏ ਕੈ ਰਾਣ ਕਹ ਚੜ੍ਹੇ ਰਸਾਏ ਜਾ ਸਰ ਜੇ ਲਾਗ ਹੈ ਸੋ ਭਟ ਚੀਨੋ ਜਾਏ ਜੁਧ ਜਵੈ ਗਾੜੋਂ ਪਰ ਓਂ ਘਾਦ ਬਾਗ ਪਾਏ ਓਹ ਰਾਜਾ ਕੋ ਬਾਣ ਲੈ ਇਹ ਨਿਰਪਹਣਿਓ ਰਸਾਏ ਚਉਪਈ ਲਾਗਤ ਬਾਣ ਰਾਵ ਰਿਸ ਭੈਓ ਸਰ ਪਰ ਨਾਮ ਲਿਖਿਓ ਲਖ ਲੈਓ ਮੋਹ ਇਨ ਹਣਿਓ ਨਿਰ ਸੁਮਾਰਿਓ ਬਹੁਰੇ ਆਪ ਹੂ ਸਵਰਗ ਸਿਧਾਰਿਓ ਦੋਹਰਾ ਨਾਜਮਤੀ ਇਹ ਚਿਰ ਤਰਸੋਂ ਦੂ ਨਿਰਪਨ ਕੋ ਘਾਏ ਬਹੁ ਰਹਿ ਵਾਰੀ ਰਾਸੋਂ ਆਣ ਦਈ ਸੁਖ ਪਾਏ ਚਉਪਈ ਨ੍ਰਿਪ ਮੈਂ ਤੁਮਰੇ ਕਾਜ ਸਵਾਰੇ ਦੋਨੋ ਸਤਰ ਤਿਹਾਰੇ ਮਾਰੇ ਅਬ ਮੋਕੋ ਤੁਮ ਕਮਾਵੋ ਦੋਰਾ ਤਬ ਰਾਜੈ ਤਾਕੋ ਤੁਰਤ ਲੀਨੋ ਸਦਨ ਬੁਲਾਏ ਕਾਮ ਭੋਗਤਾ ਸੋ ਕੀਓ ਹਿਰਦੈ ਹਰਖੁ ਉਪਜਾਇ ਏਕ ਨਿਰਪਦ ਨਿਧਿ ਕਰਹਣਿਓ ਤਾਤੇ ਦੁਤੀਏ राति मानी इंद्रप पै नाजमती सुख पाए चौपी नाजमती इंद्रप लए कर राखी त्रय कीनी राव सस कर साखी राक उती रानी कर डारयो श्रीया चरित्र न जात विचारयो हित श्री चरित्र बखियाने त्रिया चरित्रे भूप मंत्री संबादे 153 उ चरित्र समापत मस्त शुभ मस्त अपजू